एक ओंकार सतगुरु प्रसाद गुजरी श्री जयदेव जीओ का पदा कर चौथा परम आद पुर्ख मनो पिमंग सत आद पावरतंग, रतंग परम अद पुतंग प्रकृति परंग जद चिंत सर्वगतन परम आद सबसे पहला हां जी ਜੀਵਾਤਮਨ ਇਹ ਪੁਰਖ ਵੀ ਐ ਬਨ ਵੀ ਐ ਪੁਰਖ ਤਾਂ ਹੈਗਾ ਇਹਦਾ ਬੂੜ ਚਿਤ ਅੱਛਾ ਜੀ ਇਹ ਤਰਮਾਨਿਕ ਸੀਗੇ ਪੁਰਖ ਦੇ ਵਿੱਚ ਬਣ ਉਹਦਾ ਸਮਾਇਆ ਹੋਇਆ ਸੀ ਪੁਰਖ ਕੋ ਬਲੋ ਪੀਓ ਹਾਂ ਜੀ ਮਨੋ ਪੀਤਾ ਹੋਇਆ ਸੀ ਉਹਦਾ ਅੰਦਰ ਸਮਾਇਆ ਹੋਇਆ ਸੀ ਉਹਦੇ ਮਤ ਅੱਛਾ ਜੀ ਸਤ ਆਤਿ ਭਾਵ ਰਤਨ ਹਾਂਜੀ ਜਿਹੜਾ ਆਦ ਸੱਚ ਹੈ ਨਾ ਉਹਦੇ ਭਾਵ ਦੇ ਵਿੱਚ ਰੱਤਿਆ ਹੋਇਆ ਸੀ ਇਹ ਹੈ ਸ੍ਰਿਸ਼ਟੀ ਪਹਿਲਾ ਸ੍ਰਿਸ਼ਟੀ ਤੋਂ ਪਹਿਲਾਂ ਦਾ ਰੂਪ ਇਹਦਾ ਅੱਛਾ ਜੀ ਦਾ ਜਿਹੜਾ ਰੂਪ ਹੈ ਸ੍ਰਿਸ਼ਟੀ ਪੈਦਾ ਹੋਣ ਤੋਂ ਪਹਿਲਾਂ ਦਾ ਨਾ ਹਾਂਜੀ ਵਸਿਆ ਸਤਕਾ ਖੇੜਾ ਉਹ ਜਾਨੀ ਠੀਕ ਹੈ ਤੇ ਉਹ ਕੇ ਖੇੜੇ ਵਿੱਚ ਹੈ ਅੱਛਾ ਜੀ ਹਾਂ ਪਹਿਲਪੁਰੀਏ ਪੁੰਡਰਕਵਰਦਾ ਹੂੰ ਹਾਂ ਦੇ ਹਲਸਾ ਇਹ ਜਦੋਂ ਹਾਂ ਜੀ ਇਹ ਉਹ ਉਹ ਐਸਾ ਖੜਿਆ ਹੋਇਆ ਸੀ ਜਿਵੇਂ ਕਬਲ ਦੇ ਫੁੱਲ ਖਿਲੇ ਹੁੰਦੇ ਨੇ ਸਾਰੇ ਹੀ ਚਿੱਟੇ ਚਿੱਟੇ ਚਿੱਟੇ ਚਿੱਟੇ ਦਾ ਠਰਡਾਇਆ ਰੱਖਿਆ ਸੀ। ਅੱਛਾ ਜੀ। ਸਾਰੇ ਹੀ ਇਰਦੇ ਖੜੇ ਹੋਏ ਚਿੱਟੇ ਸੀ ਕਾਲਾ ਕੋਈ ਵੀ ਨਹੀਂ ਸੀ। ਅੱਛਾ ਜੀ। ਤਾਜੇ ਹੰਸਾਂ ਅਗਲੇ ਜਨਮ ਹੂੰ ਜਿਹੜੇ ਜਨਮੇ ਬਹੁਤ ਬੜੋ ਜਾਨਵਰ ਸੀ ਤੋਂ। ਹਾਂ ਗਿਆਨਵਾਨ ਹੋ ਜਾਂਦਾ ਹੈ ਜਾਨਵਰ ਜੁਦਾ। ਏਵੇਂ ਹਾਂ ਸੇ ਸੀ ਸਗਲੇ ਜਨ ਸਾਰੇ ਜਲ ਹੁਸ ਸੀ ਕੇ ਕਾਲਾ ਕੋਈ ਵੀ ਨਹੀਂ ਸੀ ਇੱਥੇ ਵੀ ਉਹੀ ਗੱਲ ਹੈ ਅੱਛਾ ਜੀ ਬਾਣਾ ਸੁਵਿਚਿਆ ਜਮਾਇਆ ਜੀ ਠੀਕ ਹੈ ਜੀ ਜਿਨੀ ਸ਼ਬਦਾਵਲੀ ਮੁਸ਼ਕਲ ਹੈ ਉਹਨੇ ਅਰਥ ਵੀ ਮੁਸ਼ਕਲ ਹੈ ਸ਼ਬਦ ਇਹ ਹਨ ਜੀ ਹਾਂ ਅਨਪੁੱਤ ਦਾ ਵਸਾ ਅੱਛਾ ਜੀ ਸੱਦੀ ਹੋਈ ਹੋਈ ਹੈ ਠੀਕ ਹੈ ਜੀ ਜਿਹੜਾ ਆਣਾ ਹੈ ਨਾ ਉਹ ਸਾਈਲੈਂਟ ਹੋ ਗਿਆ ਸੀ ਅੱਛਾ ਜੀ ਪਰ ਉਹ ਜਮਾ ਅਨਪੁੱਤ ਕੁਲਾਸਦਾ ਹੈ ਹਮ ਹਮ ਕਿੰਦਾ ਅਨਪੁੱਤ ਹੁੰਦਾ ਜਿਹੜਾ ਹੈਰਾਨੀ ਕਰਨ ਵਾਲਾ ਹੋਵੇ ਠੀਕ ਹੈ ਜੀ ਇਹਦਾ ਵਿਸਾਦ ਰੂਪ ਸੀ ਉਹਦਾ ਵਿਸਾਦ ਵਿੱਚ ਸੀ ਇਹ ਹਮ ਹਮ ਵਿਸਾਦ ਨਾ ਠੀਕ ਹੈ ਜੀ ਇਸ ਬਾਦ ਵਾਸਤੇ ਇਸ ਪਰਮਾਤਮਾ ਪੁੱਤਰ ਸ਼ਬਦ ਵਾਸਤੇ ਕੋ ਲੋੜ ਨਹੀਂ ਬਿਸਮਾਰ ਲਵਸ ਵਰਤਿਆ ਅੱਛਾ ਜੀ ਇਹ ਬਿਸਮਾਰ ਦੀ ਵਿਵਸਥਾ ਹੈ ਪ੍ਰਕਿਰਤੀ ਪਰਮ ਪ੍ਰਕਿਰਤੀ ਤੋਂ ਪੜੀ ਸੀ ਅੱਛਾ ਜੀ ਉਦੋਂ ਇਹਦੇ ਅੰਦਰ ਕੋਈ ਵੀ ਹਲਚਲ ਨਹੀਂ ਸੀ ਇਹਦੇ ਅੰਦਰ ਕੋਈ ਕਲਪਣਾ ਕਲਪਣਾ ਹੀ ਪ੍ਰਕਿਰਤੀ ਹੈ ਜਿਹੜਾ ਇਹ ਜੇ ਵਸਤਾ ਪੈਦਾ ਹੁੰਦੀ ਇਹਨਾਂ ਤੇ ਇੱਛਾ ਪੈਦਾ ਹੁੰਦੀ ਉਹ ਇੱਛਾ ਹੀ ਪ੍ਰਕਿਰਤੀ ਬਣਦੀ ਹੈ ਠੀਕ ਹੈ ਆ ਪ੍ਰਕਿਰਤੀ ਹੀ ਹੈ ਪਰਮੇਸ਼ਰ ਦੀ ਇੱਛਾ ਰਜ਼ਾ ਇਹ ਪ੍ਰਤੱਖ ਦੀ ਵੀ ਹੈ ਉਹ ਜਿਹੜੀ ਹਿਰਦੇ ਚੋਂਦੀ ਹੈ ਚਾ ਹਿਰਦੇ ਵੀ ਚਾ ਪ੍ਰਤੱਖ ਰੂਪ ਸਭ ਨੂੰ ਵੀ ਦੇਖਣੇ ਠੀਕ ਇਹ ਦਰਸ਼ਨ ਇਹਨੂੰ ਅਜਿਹੀ ਕਿ ਬੇਦਸਮਸਾਜ ਇਹਦਾ ਇਹ ਹਰਕਾਰੂਪ ਹੈ ਠੀਕ ਹੈ ਜੀ ਪ੍ਰਕਿਰਤੀ ਉਹਦਾ ਰੂਪ ਹੈ ਹੂੰ ਹੂੰ ਹਾਲੇ ਪ੍ਰਕਿਰਤੀ ਪਰਮ ਹੂੰ ਹੂੰ ਪ੍ਰਕਿਰਤੀ ਪ੍ਰੰਗ ਹਾਂਜੀ ਪ੍ਰਕਿਰਤੀ ਦਾ ਬਰੇਆ ਹੋ ਹਾਂ ਰਚਨਾ ਨਹੀਂ ਆਉਦਾਂ ਠੀਕ ਜੀ ਰਚਨਾ ਬਿਲਕੁਲ ਨਹੀਂ ਹਾਂ ਚਲੋ ਨਾ ਦਾ ਹੋਕਮਾ ਪਾਰਾ ਰੋਟਾ ਨਾ ਨਾ ਨਾ ਹੁਕਮ ਇਹ ਉਹ ਵਸਤਾ ਹੈ ਹਾਂਜੀ ਜਦ ਕਿ ਜਦ ਤੋਂ ਸਰਬਗਤਾਂ ਹਾਂਜੀ ਔਰ ਕਿਸੇ ਹਾਲਤ ਵਿੱਚ ਵੀ ਉਹਦੇ ਅੰਦਰਸ਼ਿਤਾ ਨਹੀਂ ਹੈ ਹਾਂ ਹਾਂ ਇਸੇ ਅਵਸਥਾ ਵਿੱਚ ਵੀ ਉਹਦੇ ਅੰਦਰਸ਼ਿਤਾ ਨਹੀਂ ਹੈ ਇੱਟਾ ਦਾ ਕਿਉਂਕਿ ਇੱਛਾ ਹੀ ਨਹੀਂ ਇੱਛੇ ਜਾਂਦਾ ਦੁਆਰ ਉਹ ਹੈ ਹੁਣ ਕੀ ਹੈ ਸਰਬ ਕੀ ਜਿੰਤਾ ਜਿਸ ਬਨ ਮਾਹ ਹੈ ਹੋਈ ਨਾ ਜਿੰਤਾ ਪੈਦਾ ਹੋਈ ਨਾਲ ਹਾਂਜੀ ਇਸੇ ਵਰਤਾਕ ਹੋਈ ਨਾ ਜੇ ਜਿੰਤੀ ਪੈਦਾ ਕੀਤੀ ਉਹਨਾਂ ਇੱਛਾ ਪੈਦਾ ਕੀਤੀ ਨਾਲ ਜਿੰਤਾ ਵੀ ਪੈਦਾ ਹੋਗੀ ਅੱਛਾ ਇੱਛਾ ਹੀ ਜਿੰਤਾ ਹੈ ਜਿੰਤਾ ਇਛਾ ਦਾ ਦੂਸਰਾ ਲੋਰ ਹਾਂਜੀ ਸਰਬਗਤੰਗ ਦੇ ਕੀ ਅਰਥ ਕੀਤੇ ਸੀ ਜੀ ਹਰ ਹਾਲਤ ਵਿੱਚ ਅੱਛਾ ਜੀ ਕੇਵਲ ਰਾਮ ਨਾਮ ਮਨੋਰਮੰ ਕੇਵਲ ਮਨ ਜਿਹੜਾ ਰਾਮ ਨਾਮ ਦੇ ਵਿੱਚ ਹੀ ਜੁੜਿਆ ਹੋਇਆ ਸੀ ਰਾਮ ਨਾਮ ਦਾ ਰਸ ਪੀ ਰਿਹਾ ਸੀ ਆਪਣੇ ਅੰਦਰੋਂ ਹੀ ਆਪਣੇ ਅੰਦਰੋਂ ਆਤਮਾ ਆਤਮ ਚਿੰਤਨ ਦੇ ਵਿੱਚ ਹੀ ਲੱਗਾ ਹੋਇਆ ਸੀ ਆਤਮਿਕ ਚਿੰਤਨ ਵਿੱਚ ਆਤਮਾ ਹਸਦਾ ਪਰ ਸਮਾਇਆ ਹਾਂਜੀ ਅੰਬਰੇ ਤੇ ਇਹ ਕੁਝ ਬੋਲਦਾ ਵੀ ਸੀ ਪਰ ਹਾਂਜੀ ਜੇ ਕੁਝ ਇੱਛਾ ਵੀ ਸੀ ਮਨ ਦੇ ਵਿੱਚ ਤਾਂ ਅੰਬਰ ਜਨ ਦੀ ਉਹ ਇੱਛਾ ਸੀ ਜੇ ਕੋ ਭੁੱਖ ਵੀ ਸੀ ਤਾਂ ਨਾਲੀਓ ਭੁੱਖ ਸੀ ਨਾ ਉਹ ਵੀ ਜੰਦਾ ਸੀ ਹਾਂ ਹਾਂ ਜੇ ਕੋਈ ਖਾਸ ਸੀ ਵੀ ਨਾ ਉਹ ਵੀ ਜਾਂਦਾ ਸੀ ਹਾਂ ਜਾਂਦੀ ਹੈ ਇਹ ਕਾਕੇ ਰੋਦਰਾ ਪਏ ਉੱਥੇ ਬਦ ਅੰਮ੍ਰਿਤ ਤਤਮਯੰਗ ਤਤਮਯੰਗ ਕੀ ਹੈ ਜੀ ਕਰਤ ਦੀ ਹੋਈ ਖਾਸੀ ਅੱਛਾ ਜੀ ਬੋਲਣਾ ਬੰਦਰ ਕੋ ਬੋਲਣਾ ਹਾਂ ਹਾਂ ਜੇ ਕੋ ਡਿਮਾਂਡ ਵਈ ਸੀ ਜੇ ਮਨ ਬੋਲਦਾ ਵੀ ਸੀ ਹਾਂਜੀ ਸਰ ਤਾਂ ਵਰ ਦੀ ਕੋਸ਼ਿਸ਼ ਵਾਸਤੇ ਬੋਲਦਾ ਸੀ ਭਾਵ ਬਣਦਾ ਜੀ ਸੀ ਜੇ ਕੋਈ ਯੋਧੇ ਜੇ ਕੋਈ ਇੱਛਾ ਸੀ ਕੋਈ ਡਿਮਾਂਡ ਉਹਦੀ ਤੱਤ ਦੀ ਸੀ ਇਹੋ ਉਹਦੀ ਭੁਖਰੀ ਇਹ ਰੁਗੜਦਾ ਸੀ ਇਹ ਇਹੋ ਕਰ ਰਿਹਾ ਸੀ ਠੀਕ ਹੈ ਜੀ ਕਿਹਦੇ ਸਾਕੇ ਨਾਮ ਕੀ ਲੱਗਾ ਭੂਖ ਠੀਕ ਹੈ। ਉਹ ਤੂੰ ਭੁੱਖਾ ਖਾਏ ਚੱਲੀਏ ਦੁੱਖ। ਇਹ ਦਰ ਕੇ ਕੋਈ ਦੁੱਖ ਦੀ ਸੀ ਕਿਉਂਕਿ ਸਾਚੇ ਨਾਮ ਦੀ ਭੁੱਖ ਸੀ ਨਾ ਮੈਂ ਉਹ ਬਚਾਦੇ ਸੀ ਨਾਮ ਦੇ ਨਾਲ ਜੁੜਿਆ ਤੇ ਦਾ ਹੋਰ ਮਿਲ ਰਿਹਾ ਸੀ। ਹੂੰ ਹੂੰ। ਸੀ ਜਿਹੜਾ ਸਾਚੇ ਨਾਮ ਕੀ ਲੱਗਾ ਭੁੱਖ ਉਤ ਭੁੱਖਾ ਖਾਏ ਚੱਲੀਏ ਦੁੱਖ ਉਹੀ ਗੱਲ ਹੈ ਹੋਰ ਹੈ। ਇਹ ਜਿਹੜਾ ਬਹੁਤ ਘੋਟ ਕੇ ਕਹਿੰਦੀ ਵਿਦਵਾਨ ਨੇ ਕਿਸੇ ਨੇ ਕੋਈ ਹੋਰ ਭਾਸ਼ਾ ਜੋ ਕਹਿੰਦੀ ਸਿੱਧੀ ਸਰਦੀ ਭਾਸ਼ਾ ਜੀ। ठीक है जी मर नेन, दोन, नेन नहीं जेड़ा ਉਹ ਨਾਮਲੇ ਕਹਿੰਦਾ ਉੱਥੇ ਬੇਗਮਪੁਰੇ ਦੇ ਵਿੱਚ ਜ਼ਵਾਲ ਨਹੀਂ ਉਤਾ ਨਾ ਜ਼ਵਾਲ ਉਹ ਜਦ ਤੱਕ ਇਹ ਲਫ਼ਜ਼ ਲਿਖਿਆ ਹੈ ਅੱਛਾ ਜੀ ਇਸ ਅਵਸਥਾ ਦੇ ਢਿੱਕੇ ਆਉਣ ਦਾ ਕੋਈ ਉੱਥੇ ਡਲ ਰਹੀ ਸੀ ਹਾਂ ਹਾਂ ਇਸ ਅਵਸਥਾ ਦੇ ਅਨੁਸਾਰ ਇਹ ਭੰਗ ਹੋਣ ਦਾ ਕੋਈ ਖਤਰਾ ਨਹੀਂ ਸੀ ਉੱਥੇ ਠੀਕ ਹੈ ਉਹ ਲੋਰ ਕੁਝ ਹੈ ਨਹੀਂ ਸੀ ਹੂੰ ਹੂੰ ਥੋੜ੍ਹ ਹੈ ਨਹੀਂ ਸੀ ਭਾਇਆ ਹੈ ਨਹੀਂ ਸੀ ਦੇਖਣ ਨੂੰ ਕੁਝ ਹੈ ਨਹੀਂ ਸੀ ਠੀਕ ਹੈ ਜੀ ਤੇ ਦਨੋਤ ਤੋਂ ਕੀ ਭਾਵ ਲੈਣੇ ਆਪਾਂ ਬੋਲੋ ਅੱਛਾ ਜੀ ਦੋਨੋਂ ਨਹੀਂ ਸੀ ਇੱਕ ਦਾ ਜੱਸ ਦਾ ਠੀਕ ਹੈ ਜੀ ਇੱਕ ਮਾਰਣ ਦਾ ਹਾਂ ਦਾ ਇੱਕ ਜਰਾਲ ਬੋਲਣ ਦਾ ਹੂੰ ਦੀ ਬੋਲਣ ਠੀਕ ਹੈ ਜੀ ਕੋਈ ਘਾਟਾ ਪੈ ਰਿਹਾ ਉੱਥੇ ਉਹ ਜਰਾ ਰੋਗ ਜਰਾ ਰੋਗ ਜਿਹੜਾ ਉਹਦਾ ਖਾਰ ਦਿੰਦਾ ਹੁੰਦਾ ਕਿਸੇ ਵੀ ਚੀਜ਼ ਨੂੰ ਠੀਕ ਹੈ ਜੀ ਕੀ ਸਰੀਰ ਹੈ ਮਾਇਆ ਹੀ ਹੈ ਰੋਗ ਹੁੰਦਾ ਹੀ ਨਹੀਂ ਠੀਕ ਜਰਾ ਰੋਗ ਕਿਸੇ ਨਾਮ ਨਾਲ ਸੀ ਇਸ ਲਈ ਜਵਾਲ ਨਹੀਂ ਸੀ ਠੀਕ ਮਲਦੀ ਪਤਾਂ ਦੀ ਜਰਾ ਰੋਗ ਔਰ ਮਲਨ ਦੋਏ ਨਹੀਂ ਸੀ ਉੱਥੇ ਜਰਾਦ ਦਾ ਮਤਲਬ ਬੁੜਾਪਾ ਜੀ। ਜਰਾ ਰੋਗ ਹਾਂ ਠੀਕ ਹੈ ਜੀ ਇਹ ਹਾਂਜੀ। ਉਹ ਤੇ ਜਾ ਉਹ ਜਰਾਦ ਉਹ ਤੇ ਕੀ ਹੋਣੀ ਹੈ ਜੋਦ ਨੂੰ ਜਰਾਦ ਹੁੰਦੀ ਹੈ ਜਰਾ ਰੋਗ ਸੱਚ ਨਾਲ ਮਾਇਆ ਜੇ ਹੁੰਦਾ। ਅੱਛਾ ਜੀ। ਪੁਰਾਣਾ ਪੁਰਾਣਾ ਹੋਵੇ ਨਾ ਜੀ। ਠੀਕ ਹੈ ਜੀ ਤੇ ਦਾ ਮਤਲਬ ਕੋਈ ਭੈ ਨਹੀਂ ਸੀ ਮਰਨ ਦਾ ਕੋਈ ਭੈ ਨਹੀਂ ਸੀ। ਉੱਤੇ ਕੋਈ ਭੈ ਨਹੀਂ। ਬਲ ਬਲ ਨਾ ਪੈਦਾ ਦਤਾ ਹੁੰਦਾ ਜੇ ਜਰਾ ਜਰਾ ਹੋ ਗਈ ਇਹ ਪੈਗਾ ਦਾ ਹੁੰਦੇ ਬਲ ਦਾ ਹੂੰ ਹੂੰ ਠੀਕ ਹੈ ਜੀ ਇਹ ਪੈਗਾ ਦਾ ਹੁੰਦੇ ਜਾਮਾਦ ਪਰਾ ਭੈੰਗ ਜਸ ਸੁਵਸਤ ਸੁਕ੍ਰਿਤ ਕਰਤੰ ਠੀਕ ਹੈ ਜੀ ਇਹ ਚਾਰ ਭੈ ਤੋਂ ਬਰੇ ਸੀ ਹਮ ਹਮ ਕਿਹੜਾ ਆ ਇੱਛੇ ਸ ਇਚਾਈ ਕੋਈ ਕੋਈ ਇਸ ਘਰ ਦੇ ਜਾਮਰ ਦਾ ਉੱਥੇ ਕੋਈ ਡਾਲਦੇ ਸੀ ਭੈ ਦੇ ਸੀ ਹਮ ਕੋਈ ਡਾਲਉਂ ਤਾ ਹੈ ਨਹੀਂ ਹਮ ਹਮ ਕਿਆ ਕਿਆ ਸ ਜਿਹੜਾ ਸੀ ਫੋਲਣਾ ਜਿਹੜਾ ਸੀ ਸੁਕ੍ਰਿਤਿਕ ਰਤਬ ਜਿਹੜਾ ਆਤਮ ਆਤਮੋ ਜਸ ਸੀ ਆਤਮ ਰਸ ਆਤਮ ਜਸ ਆ ਆਪਣੀ ਅਵਸਥਾ ਇੱਕ ਦੀ ਅਵਸਥਾ ਸੀ ਉਦੋਂ ਠੀਕ ਹੈ ਜੀ ਜਿਹੜਾ ਇਹ ਕਹ ਇੱਕ ਸੀ ਉਦੋਂ ਕੋਈ ਅਵਸਥਾ ਨਹੀਂ ਹੋਣੀ ਚਾਹੀਦੀ ਇਹ ਰਹਿਿਆ ਤਾਂ ਇੱਕੋ ਜੰਦ ਉਹ ਇੱਕ ਨੂੰ ਜਾਣਦਾ ਸੀ ਕਿ ਆਪ ਇੱਕ ਸੀ ਇੱਕ ਦੀ ਉਸੇ ਵਾਰੇ ਸਾਰਾ ਗਿਆਨ ਉਸੇ ਹੂੰ ਹੂੰ ਇੱਕ ਦਾ ਜਸੋਦ ਉਹ ਯਾਦਦਾ ਸੀ ਕੀ ਹੁੰਦਾ ਹੂੰ ਹੂੰ ਪਰ ਜਾਂਦ ਕਿਰ ਕੋ ਹੋਊਗਾ ਇੱਕ ਦੀ ਉਸਤ ਜਦੇ ਕਰ ਸਕੂਗਾ ਹੋਏ ਗਿਆਨ ਕਾ ਉਹਨਾਂ ਜਾਣ ਸਕੋਏ ਠੀਕ ਹੈ ਜੀ ਕਿਤਨਾ ਵੇਲੇ ਇਹ ਨੂੰ ਸੀ ਉਹ ਜਾਂ ਇੱਕ ਹਾਲਾ ਹੋਇਆ ਕੋਈ ਬਲੇ ਹੋਇਆ ਠੀਕ ਹੈ ਉਹ ਵੀ ਵਿਸਰਿਆ ਆਤਮ ਰਸ ਆਤਮ ਗਿਆਸ ਇਹ ਵਿਸਰਿਆ ਹੋਇਆ ਆਤਮ ਭਗਤੀ ਆਤਮ ਗਿਆਨ ਆਤਮ ਧਿਆਨ ਇਹ ਚੀਜ਼ੋ ਵਿਸਰੀ ਸੀ ਉਹ ਤੇ ਆਤਮ ਧਿਆਨ ਦੀ ਵੀ ਸੀ ਆਤਮ ਗਾਇਨੀ ਵੀ ਸੀ ਆਤਮ ਰਸੀਆ ਵੀ ਸੀ ਆਤਮ ਜੋਗੀ ਵੀ ਸੀ ਇਹ ਸਭ ਚੀਜ਼ਾਂ ਰੋ ਸੀ ਹੁਣ ਹੈ इच्छस जामाद परापयंग जस स्वस्त सुकृत कृतंग इच्छ जमद परापयंग परेसी ना पैतो हम्म हम्म जस ती सुकृति यार जस ती सुकृति ਭਰ ਜਾ ਸਕਾਇਲੇ ਦੇ ਬਣਾ ਜੋ ਸੰਗੀ ਹੈ ਤੇਰਾ ਜਿਹੜਾ ਜਾਸਾ ਇੱਥੇ ਗੱਲ ਦਾ ਆਦਤ ਪਾਉਣੀ ਹੈ ਗਉਂਦੇ ਹੀ ਰਹਿਣ ਹੂੰ ਹੂੰ ਜਾਵੇ ਸ਼ੁਰੂ ਹੋ ਜਾਣੀ ਅੱਛਾ ਜੀ ਹ ਹਾਰੇ ਬਿਸਰਦਾਂ ਦਾ ਫਾੜੀ ਹੂੰ ਹੂੰ ਆਪਣੇ ਮੂਲ ਦਾ ਵੀ ਮੈਨੂੰ ਆਪਣੇ ਮੂਲ ਨਾਲ ਜਿਵੇਂ ਇੱਕ ਹੋਇਆ ਚਿੱਦਰ ਦੇ ਦੇਖ ਲੂ ਗਰਮੀ ਤੋਂ ਬਚਿਆ ਹੋਇਆ ਔਰ ਲੋਚ ਠੱਡਕ ਤੇ ਅੱਛਾ ਜੀ ਉਹ ਜਿਹੜਾ ਉਹਨੂੰ ਆਨੰਦ ਆ ਰਿਹਾ ਉਹ ਜੀਤੋ ਆ ਰਿਹਾ ਉਹਦਾ ਯਾਸ ਕਰ ਰਿਹਾ ਹਾਂ ਹਾਂ ਰੂ ਆਦਮ ਪਰ ਬਿਛਤਾ ਹੱਡਾ ਢੰਦੇ ਹਾਂ ਹਾਂ ਪਰ ਬਾਨਾਰ ਚੀਜ਼ ਹੈ ਆਪਣੇ ਮੂੜ ਦਾ ਯਾਸ ਕਰ ਰਿਹਾ ਅਸਲ ਵਿੱਚ ਇਸ ਕਰਕੇ ਆਦਮ ਜਿਹਾ ਇਸੇ ਹਾਂ ਆਪਣੇ ਮੂਲ ਤੋਂ ਜੋ ਰਸ ਆ ਰਿਹਾ ਆਤਮ ਰਸ ਇਹ ਹੂੰ ਹੂੰ ਕਿਸੇ ਨਾਲ ਹੀ ਕਰ ਰਿਹਾ ਰਸ ਆਪਣੂ ਹੀ ਕਰ ਰਿਹਾ ਹੈ ਅੱਛਾ ਜੀ ਜਸਤ ਜਸ ਸਵਸਤ ਸ਼ੁਕਰਗ੍ਰਤਨ ਸਵਸਤ ਹੂੰ ਸੀ ਇਹੀ ਕਰਦਾ ਸੀ ਠੀਕ ਹੈ ਜੀ ਸੀ ਨਾ ਹੂੰ ਹੂੰ ਸੀ ਆਪਣਾ ਜਸ ਕਰਦਾ ਜਸ ਕਰਦਾ ਉਹ ਆ ਤੁਸੀਂ ਕਹਿੰਦੇ ਹੋ ਠੀਕ ਹੈ ਸੱਤ ਦਾ ਜਾਸ ਕਰਦਾ ਆਪਣੇ ਵੀ ਕਰਦਾ ਸੀ ਉਹ ਕਿਸੇ ਦਾ ਨਹੀਂ ਸੀ ਕਰਦਾ ਠੀਕ ਹੈ ਜੀ ਹੂੰ ਭਵ ਭੂਤ ਭਾਵ ਸਮ ਬਯੰ ਪਰਮੰ ਪ੍ਰਸੰਨ ਮਿਦੰ ਇਹ ਕਰਕੇ ਹੀ ਸੀ ਨਾ ਹੂੰ ਹੂੰ ਭਾਵ ਦਾ ਨਾ ਕੋਈ ਉੱਤੇ ਸਵਾਲ ਇਹ ਨਹੀਂ ਸੀ ਠੀਕ ਹੈ ਐਸੀ ਕੋਈ ਚੀਜ਼ ਨਹੀਂ ਬਾਇ ਵਾਲੀ ਤਾਂ ਹਾਂ ਸੀ ਉਦੋਂ ਕੋਈ ਬਾਆ ਰੂਪੀ ਚੀਜ਼ ਨਹੀਂ ਸੀ ਜੀ ਸੰਬਿਆਂ ਕੀ ਹੁੰਦਾ ਜੀ ਇਹਦੇ ਸਾਮਾਨ ਐਸੇ ਵਰਗੀ ਹਾਂ ਹਾਂ ਪਾਪ ਉਦ ਵਰਗੀ ਕੋਈ ਹੋਰ ਚੀਜ਼ ਨਹੀਂ ਸੀ ਇਹ ਜੀ ਬਾਇਆ ਹੈ ਨਾ ਹਾਂਜੀ ਇਹ ਚਲ ਇੱਥੇ ਬਾਇਆ ਉੱਥੇ ਕੁਝ ਹੋਰ ਹੋਵੇ ਹੈ ਜਾਂ ਹਾਂ ਇਹ ਤਾਂ ਬਾਇਆ ਹੈ ਨਾ ਪੜਤ ਹਾਂਜੀ ਪਰ ਉੱਥੇ ਚਲ ਕੁਝ ਹੋਰ ਹੋਵੇ ਹੂੰ ਹੂੰ ਹੁਣ ਜਗਾ ਜਗਾ ਅੜਾੜੋ ਉੱਡਲਵਾਇਉ ਹੈ ਹੈ ਜੀ ਕੋਈ ਹੁੰਦਾ ਤੇ ਹੁੰਦੇ ਰਹਿ ਜਾਂਦੇ ਇਹ किल्ला इतेदा आप आया उठे ने और किस भी चीज होवे आया ना ना इनकी तुझे ते ही नहीं कोई ठीक है जी लोबाद दृष्टि पर गृहं जद विद आचरणं तज सकल दुखकृत दुर्मति भज चक्रधर शरणं जदो जानोगा लोबाद दृष्टि ਉਹ ਜਰਾ ਦੇ ਜਿਹੜਾ ਜਾਣਦਾ ਹੂੰ ਹੂੰ ਪਸ ਇਹ ਜਾਲ ਜਿਹੜਾ ਹੈਗਾ ਇਹ ਤੁੱਕੇਤੀ ਹੋਗੀ ਫਿਰ ਤੇ ਅੱਗੇ ਕੰਕੜ ਗਿਆ ਨਾ ਹੋ ਜਾਂਦਾ ਫਿਰ ਹੂੰ ਅੰਤਰ ਮੁਖੀ ਹੈ ਉਹ ਵਾਤਾ ਜਾਂ ਬਾਹਰ ਮੁਖੀ ਹੋ ਗਿਆ ਤਾਂ ਦੂਸਰੀ ਵਸਤੂ ਹੋ ਗਈ ਮਾਇਆ ਉਹ ਵੀ ਸੀ ਮਾਇਆ ਦਾ ਰੂਪ ਹੋਰ ਸੀ ਮਾਇਆ ਸ਼ਕਤੀ ਰੂਪ ਹੈ ਉੱਥੇ ਆਰਾ ਪਰ ਹਿਰਦੇ ਤੋਂ ਬਾਹਰ ਹੈ ਆਪਣੇ ਅੰਦਰ ਸੀ ਚਲ ਬਾਹਰ ਜਾਊਗਾ ਹਿਰਦੇ ਤੋਂ ਮੈਂ ਉੱਥੇ ਵੀ ਲੱਗ ਜਾਣੀ ਠੀਕ ਹੈ ਜੀ ਤੇ ਜਦ ਵਿਦ ਆਚਰਣ ਜਦੋਂ ਇਹ ਇਸ ਵੀ ਦੇ ਆਚਰਣ ਲੋ ਗਿਆ ਹੂੰ ਹੂੰ ਇਸ ਤਰ੍ਹਾਂ ਦਾ ਜਨਨ ਕਿਹਦਾ ਠੀਕ ਹੈ ਬਦਲ ਗਿਆ ਨਾ ਹਾਂਜੀ ਉਲਟਾ ਹੋ ਗਿਆ ਬਾਹਰ ਮੁਕੀ ਹੋ ਗਿਆ ਅੰਦਰੋਂ ਆਪਣੇ ਮੂਹਰ ਨੂੰ ਟੁੱਟ ਕੇ ਬਾਹਰ ਮੁਕੀ ਹੋ ਗਿਆ ਤਜ ਸਕਲ ਦੁਖਕ੍ਰਿਤ ਦੁਰਮਤੀ ਭਜ ਚੱਕਰ ਧਰ ਸ਼ਰਨ ਤੋ ਹੁ ਆ ਜਿਹੜਾ ਬਹਾਲਾ ਪਾਸਾ ਛੱਡ ਕੇ ਤਜ ਕੇ ਸਕਲ ਦੁਖ੍ਰਿਤੀ ਇਹ ਦੁਖ੍ਰਿਤੀਆਂ ਇਹਨੂੰ ਛੱਡਦੇ ਹੁ ਹੂੰ ਇਹਦੇ ਨਾਲੇ ਤੁਨ ਬਤੌਹਦੀ ਐ ਹੂੰ ਹੂੰ ਆਜੇ ਚੱਕਰ ਤਰ ਤਾਂ ਫੇਰ ਉਸੇ ਚੱਕਰ ਤਰ ਦੀ ਛੜਨ ਆ ਜਾ ਜਿਹੜੀ ਛੜ ਛੰਟੀ ਸੀ ਹੂੰ ਹੂੰ ਬਾਹਰ ਦੇਤੀ ਗਈ ਦੁੱਖ ਸ਼ੁਰੂ ਹੋ ਜਾ ਫੇਰ ਮੁੜ ਕੇ ਉੱਥੇ ਬਸ ਚੱਕਰ ਤਰ ਤੋਂ ਕੀ ਹੋ ਕਿਉਂਕਿ ਲੋਕਾਂ ਦਾ ਇਹ ਵੀ ਲੱਗਦਾ ਚੱਕਰ ਤਰ ਹੋਰ বিষ্ণੂ ਨਾਮ ਲੈਣਾ ਕੋਈ ਨਹੀਂ বিষ্ণੂ ਤਾਂ ਇਹ ਚੱਕਰ ਉਹ ਬਾਯਾ ਦਾ ਬਣਾ ਲੈ ਤੇ ਬਾਯਾ ਦਾ ਕਹਤਾ ਹੈ ਜੈ ਸੁਦਰਸ਼ਨ ਚੱਕਰ ਨਹੀਂ ਫਿਰਦਾ ਆਦਾ ਹੋ ਉਹਨੇ ਖਬਰ ਤੇ ਬਣਾ ਲਿਆ ਉਹਨਾਂ ਦੀ ਸੋਚ ਹੈ ਠੀਕ ਹੈ ਉਹ ਦਰਸ਼ਨ ਹੈ ਉਹ ਤਾਂ ਆਪਣਾ ਹ ਚਕਰਤਾ ਹੈ ਤਾਂ ਸੁਦਰਸ਼ਣੀ ਉਹਦੇ ਵਿੱਚ ਉਹ ਵੀ ਦਰਸ਼ਨ ਦੀ ਮਤਲਬ ਹੈਗਾ ਆਪਣਾ ਮੂਲ ਇਹ ਹੈ ਹਾਂਜੀ ਇਹ ਸੁਦਰਸ਼ਣ ਚਕਰ ਹੈ ਹੋਰ ਕੀ ਹੈ ਠੀਕ ਹੈ ਉਪਾਤ ਜੀ ਇਹਦੇ ਮੁੜ ਕੇ ਹਰਦਾ ਰਹੀ ਇਹ ਦੱਖਣ ਚੱਕਰਿਆ ਹੋਰ ਕੀ ਹੈ ਹਾਂ ਹਾਂ ਮੁੜ ਕੇ ਫੇਰੋਤੀ ਆ ਗਿਆ ਕੋ ਚੱਕਰ ਕੀ ਹੈ ਹੂੰ ਨੂੰ ਬਾਹਰ ਚੱਕਰ ਦੀ ਅਸੀਂ ਹੁਣ ਦੱਸ ਕਰੀਏ ਹਾਂ ਜੀ ਬੇਟਾ ਪਰਟਲ ਦੇਖ ਲੈ ਰਹੋ ਠੀਕ ਦੀ ਆਈ ਇੱਥੋਂ ਦਾ ਜਿਹੜਾ ਇਹ ਨੂੰ ਹੋਵੇ ਤਾਂ ਗੱਲ ਪਤਾ ਲੱਗਦਾ ਠੀਕ ਹੈ ਉਹਦਾ ਬਿਸ਼ਾ ਵਾਲਾ ਚੱਕਰ ਜਿਹੜਾ ਪੜਨ ਲੈ ਹਰ ਭਗਤ ਨਿਜ ਨਿਹ ਕੇਵਲਾ ਰਿੱਧ ਕਰਮਨਾ ਦੇਖੋ ਇੱਥੇ ਦੋ ਆ ਗਏ ਹੁਣ ਹਰ ਔਰ ਰਿੱਧ ਆ ਗਏ ਭਗਤੀ ਵਿਚਾਲੇ ਹੈ ਹਰ ਭਗਤ ਦੇ ਜੰਦੀ ਚ ਭਗਦੇ ਆ ਹਰ ਭਗਤ ਹਰ ਹਲਿਜ ਹੂੰ ਹੂੰ ਦੋਏ ਬਖਰੇ ਅੱਛਾ ਜੀ ਦੋਆ ਨਾ ਕਰੂ ਬਹੁਗਾ ਹੂੰ ਹੂੰ ਦੋਏ ਦੋਏ ਕਰੂ ਬਹੁ ਸਕਦੇ ਨੇ ਹੂੰ ਹੂੰ ਨਾਲ ਲੱਗੇ ਆ ਉਹ ਤੇ ਪ੍ਰਭਜਲ ਦੀ ਭਗਤੀ ਦੀ ਗੱਲ ਰਹੀ ਕੀਤੀ ਹੋਈ ਹਮਮ ਪਰਵਾਨੀ ਕਿ ਹਮਮ ਪ੍ਰਮਾਤਮਾ ਦੀ ਭਗਤੀ ਦੀ ਗੱਲ ਕਰਦੇ ਕਿਹੜੇ ਭਗਤੀ ਦੀ ਗੱਲ ਕਰਦੇ ਨੇ ਹਮਮ ਵਰਵਾਨੀ ਨੇ ਜਿਹੜੇ ਭਗਤੀ ਸੀਲ ਵਰਤੀ ਹੈ ਆਪੇ ਜਬੋ ਆਪਣਾ ਜਪ ਕਹਿੰਦੀ ਹੈ ਹਮਮ ਨਾਨਕ ਬੰਨਾ ਆਪਾ ਜੀ ਨੇ ਮੇਰੇ ਕੀ ਕਾਈ ਕਹਿੰਦੀ ਹੈ ਇਹਨਾਂ ਨੇ ਸੁਣੀ ਹੈ ਗੱਲਾਂ ਆਪਣੀ ਵਾਲੀ ਗੱਲ ਦਾ ਅਸਰ ਹੋ ਗਿਆ ਇਹ ਗੱਲਾਂ ਦਾ ਉੱਤੇ ਦੀ ਲੁਗਾਰਤੀ ਹਲ-ਫੁਲੀਆਂ ਕਰਤੀਆਂ ਸਾਰੀ ਇਹ ਜਦਾਂ ਚੱਕਰ ਬਾਕੀ ਜੇ ਕੱਲ ਨਾ ਨਿਕਲੀ ਧੀਰਜ ਨਾਲ ਇੱਥੇ ਕੋਈ ਕਹ ਦੇ ਚੱਕਰ ਜੇ ਤਾਂ ਪਤਾ ਹੂੰ ਇਹ ਤਾਂ ਵੀਰ ਕੋਲ ਹੁਣ ਦੇਖ ਲੋ ਦੇਖ ਲੋ ਦੇਖਿਆ ਦੇਖ ਲੈਣੇ ਆ ਜੀ ਹਾਂ ਤਿੰਨ ਨੰਬਰ ਪਰ ਹੈਗਾ ਹਾਂ আচ্ছা ਹਰ ਹਰ ਹਰ ਭਗਤ ਉਹ ਨਿਜ ਦਾ ਇਹਨੇ ਸਮਝਾਓ ਵੀ ਨਿਜ ਦਾ ਮਤਲਬ ਹੈਗਾ ਵੀ ਆਪਣੇ ਮੂਲ ਦਾ ਹਰ ਆਪਣੇ ਮੂਲੇ ਦਾ ਹਰ ਹੈ ਠੀਕ ਹੈ ਜੀ ਜੱਬ ਹਰ ਹਿਰਦੇ ਪਰ ਦੇਖੋ ਮੈਂ ਦੱਸਦਾ ਇਹਦਾ ਦਰਬਰ ਹੂੰ ਫਿਰ ਆ ਦੇਖੋ ਤੁਸੀਂ ਇਹ ਦੇਖ ਲਿਆ ਜਿਵੇਂ ਉਹ ਲਿਖਦਾ ਸਹੀ ਹੈ ਗੱਲ ਉਹ ਪ੍ਰਭੂ ਜਿਸ ਦੇ ਹੱਥ ਵਿੱਚ ਸੁਦਰਸ਼ਨ ਚੱਕਰ ਹੈ ਉਹ ਪ੍ਰਭੂ ਜੋ ਸਭ ਨੂੰ ਨਾਸ਼ ਵੀ ਕਰ ਸਕਦਾ ਹੈ ਚੱਕਰਧਰ ਚੱਕਰਤਾਰੀ ਸੁਦਰਸ਼ਨ ਚੱਕਰਤਾਰੀ ਮੈਂ ਤਾਂ ਪੜਿਆ ਨਹੀਂ ਸੀ ਹੁਣ ਪੜਿਆ ਪੜਿਆਣਾ ਹਾਂਜੀ ਮੈਂ ਕਹਾਂ ਭਗਤੀ ਕਹੋ ਮੈਂ ਕਹਿਣਾ ਵੀ ਪਕਤੀ ਕੱਢੋ ਮੈਂ ਪੂਰਤੀ ਪੂਜਾ ਪੜ ਲਿਖੀ ਹੈ ਦਾ ਇਹਦਾ ਰੋਲਾ ਰੋਲਾ ਪਾਇਆ ਹੈ ਹਾਂਜੀ ਇਹ ਕਿਲਾ ਹੋਊਗਾ ਹਜ਼ਾਰਾਂ ਉਗਣੀਆਂ ਖੜੀਆਂ ਲੜ ਗਈਆਂ ਕੁਰਬਾਨੀ ਤੇ ਹੂੰ ਜਿਹੜਾ ਇਹ ਬਾਦ ਨਾ ਬਗ਼ੀ ਬਦਵਾਨ ਹਾਂਜੀ ਹਜ਼ਾਰਾਂ ਉਗਣੀਆਂ ਤੇ ਖੜੀਆਂ ਹੋ ਜਾਣਗੀਆਂ ਹੂੰ ਜਿਸ ਤਰੀਕੇ ਦੇ ਨਾਲ ਕੋ ਅਰਥ ਨੇ ਠੀਕ ਕੀਤੇ ਸਾਂਝੜੇ ਤੋਂ ਪਕਤੀ ਕਰਨ ਲਈ ਬਾਇੜੀਏ ਸਾਨੂੰ ਹੂੰ ਹੂੰ ਇਹਦਾ ਜੀ ਮੁਰਦੀ ਪੂਜਾ ਹੂੰ ਹੂੰ ਇਹ ਆਰ ਤਾਂ ਠੀਕ ਨਾ ਹੋ ਜਾਣ ਸ਼ਰਾਸਤ ਬਹੁਤ ਗਹਿਰੀ ਹੈ ਅਰ ਜਿਹਨੇ ਕਰਾਇਰੇ ਉਹਨੂੰ ਪਤਾ ਜੇ ਆਰ ਠੀਕ ਹੋ ਗਏ ਮੁੜ ਕੇ ਉਹੀ ਹਾਲਾਤ ਫਾਇਦਾ ਹੋ ਜਾਣੇ ਜਿਹੜੇ ਗੁਰੂਆਂ ਵੇਲੇ ਸੀ ਹੂੰ ਕਰਕੇ ਆਰ ਤਾਂ ਸਤ ਕਰੋੜਾ ਰੁਪਏ ਹਰ ਬਣ ਵੀ ਖਰਚ ਕਰ ਸਕਦਾ ਹੈ ਇਹ ਵਾਲ ਲੋਨ ਆਰਥਾ ਨਾਲ ਪਤਾ ਲੱਗ ਗਿਆ ਹੂੰ ਹੂੰ ਸਾਰੇ ਉਹ ਕਹਿੰਦੇ ਸਾਰੇ ਜਿਹੜਾ ਵੇਦਏ ਹੂੰ ਹੂੰ ਸਾਰੇ ਮਦਰਾ ਗਈ ਹੂੰ ਹੂੰ ਕਿ ਜਿਹੜੇ ਇਹਨਾਂ ਦੇ ਖਿਲਾਫ ਨੇ ਹੂੰ ਅੱਜ ਵਰਡ ਦੇ ਵਿੱਚ ਜਿਹੜੇ ਆਦਮੀ ਉਹਨਾਂ ਦਾ ਰੋਣਾ ਬੰਦ ਹੂੰ ਹੂੰ ਤਾਂ ਆਪ ਨੂੰ ਤੋਂ ਚੜ੍ਹਦਾ ਉੱਤੇ ਇਹਨਾਂ ਦਾ ਸਾਰਾ ਸੱਚਾ ਨਾਸ ਇਹ ਗੱਲ ਦਾ ਫਿਕਰ ਹੈ ਇਹ ਵਿਦਵਾਨ ਇਹ ਜੇ ਪੈਸੇ ਤਾਂ ਆਏ ਤਾਂ ਜ਼ਰੂਰ ਪੈਸੇ ਹੋ ਇਹਨੂੰ ਕੀ ਗੱਡਾ ਡਿਫੈਂਸ ਕਰਦੇ ਜੇ ਠੀਕ ਹੈ ਸਾਡੇ ਵਿਚਾਰਤਾਰਾ ਜ਼ਮਾਨਾ ਹੈ ਗਿਆਨ ਦਾ ਜ਼ਮਾਨਾ ਲੋਕਾਂ ਨੇ ਸਾਰਿਆਂ ਨੇ ਮੰਨ ਲਿਆ ਅੱਗੇ ਆ ਬੇ ਉੱਤੇ ਲੋਕ ਹੁਣ ਵੀ ਉਰੇ ਲੋਕ ਜ਼ਮਾਨਾ ਬਦਲ ਗਿਆ ਜੇ ਹੁਣ ਇਹ ਅਰਥ ਬਣ ਲਈਏ ਜਿਹੜੇ ਪੰਕੀਤੇ ਨੇ ਸਾਹ ਤੋਂ ਨੇ ਫੇਰੇ ਕੀ ਬਣੀ ਫਿਰ ਰੋਡ ਇਹਦੇ ਚ ਹੂੰ ਹੂੰ ਤਾਂ ਵੀ ਹੋਰ ਸੀ ਹੋ ਤਾਈ ਹੋਈ ਏ ਹੂੰ ਹੂੰ ਹੋ ਗਿਆ ਖੜਾ ਹੂੰ ਗਲਤ ਕੀਤੇ ਹੋਏ ਨੇ ਪਸਦੀ ਠੀਕ ਅਸੀਂ ਇਹ ਕਰੂਗੇ ਹਾਂਜੀ ਦੇ ਵਿੱਚ ਰੁਕਸ ਨਹੀਂ ਅਰਥਾਂ ਚ ਰੁਕਸ ਇਹ ਲੜਾਈ ਹੈ ਵੀ ਉਹ ਰਾਹੀ ਹੈ। ਉਹ ਤਾਂ ਪ੍ਰਮਾਤਮਾ ਦੀ ਕੇਵਲ ਪ੍ਰਮਾਤਮਾ ਦਾ ਸੁੰਦਰ ਨਾਮ ਸਿਮਰ ਉਹ ਪ੍ਰਮਾਤਮਾ ਸਭ ਤੋਂ ਉੱਚੀ ਹਸਤੀ ਹੈ। ਬਸ ਉਹ ਜਿਹੜੇ ਮੂਲ ਦੇ ਅੱਖਰ ਛੱਡ ਗਏ ਪ੍ਰਮਾਤਮਾ ਤੇ ਪਿੱਛੇ ਪੈ ਗਏ। ਪ੍ਰਮਾਤਮਾ ਦਾ ਕੋਈ ਲਖਦੇ ਨਹੀਂ ਸਾਰੀ ਗੁਰਬਾਣੀ ਚ। ਉਹ ਪਰਮੇਸ਼ਰ ਨੂੰ ਹੀ ਪ੍ਰਮਾਤਮਾ ਦੱਸੀ ਜਾਂਦੇ ਨੇ। ਪਰਮੇਸ਼ਰ ਪ੍ਰਮਾਤਮਾ ਹੁੰਦਾ। ਹਾਂ ਭਈ ਗੁਰਮਤਿ ਚ ਤਾਂ ਨਹੀਂ ਹੁੰਦਾ ਪਰ ਉਹਨਾਂ ਨੂੰ ਬਸ ਐਸੇ ਭਲੇਖੇ ਸਾਰੇ ਅਰਥ ਹੋਏ ਹੋਣ। ਉਦੇ ਉਦੇ ਦੇਖੋ ਆਪਣੇ ਉਹਦੇ ਵਿੱਚ ਦਿੱਕਤੀ ਜਿਹੜੀ ਹੁਣੇ ਖੋਲ ਕੇ ਹਮ ਹਮ ਪਰਮਾਤਮਾ ਦਾ ਪਹਿਲਾ ਲਿਖ ਦਿੰਦਾ ਪਰਮ ਆਤਮਾ ਦਾ ਪਹਿਲਾ ਅਰਥ ਪਰਮ ਲਿਖਿਆ ਗਾਂਹ ਪਰਵੇਸ਼ ਪਰਵੇਸ਼ਰ আর ਪਰਮਾਤਮਾ ਡੋਟ ਉਹਦੇ ਨੇ ਇਹਨੂੰ ਇਹਨਾਂ ਖਿਆਲ ਨਹੀਂ ਦਿੱਤਾ ਸੀ ਪਰਦਤ ਨੇ ਉਹ ਜਾਣ ਕੇ ਕੀਤੀ ਜਿਹੜੀ ਚ ਰੌਲਾ ਪਾਇਆ ਅਨੰਦ ਦਾ ਪਰਮ ਰੂਪ ਤਾਂ ਇਹ ਧਰਮ ਖਤਮ ਕਰਨਾ ਸੀ ਵੇਦ ਵਾਲਾ ਧਰਮ ਖਤਮ ਕਰਨਾ ਸੀ ਭਲਾ ਉਹਦਾ ਤਾਂ ਪੇਸ਼ਾ ਸੀ ਹੂੰ ਤਾਂ ਛੋਡੂ ਸੀ ਨਾ ਪਰਮ ਆਤਮਾ ਆਤਮਾ ਦੀ ਸਰਵ ਸੇ ਸਫਾਰਦਾ ਬੜੀ ਪਰਮ ਆਤਮਾ ਦਾ ਜਨੂਨ ਪਰਮ ਆਤਮਾ ਹਾਂਜੀ ਜਿਨ੍ਹਾਂ ਦੀ ਬਾਣੀ ਹੈ ਜਿਨ੍ਹਾਂ ਗੁਰੂ ਪਰਮ ਆਤਮ ਦੇ ਹੋ ਹਾਂ ਜੀ ਪਰਮੇਸ਼ਰ ਦੇ ਬਲ ਵੜ ਜਣਗੇ ਉਹ ਪਰਮੇਸ਼ਰ ਦੇ ਦਾਸ ਰਹਿਣਗੇ ਜਿੰਨਾ ਚਿਰ ਇੱਥੇ ਦੇ ਜੇ ਉਹਨਾਂ ਦਾ ਨਾਮ ਵੱਖਰਾ ਨਾਮ ਕਹਤਾ ਦਾਸ ਰਹਿ ਹੋ ਜਿੰਨਾ ਚਿਰ ਬੂਦ ਸਮੁੰਦਰ ਤੋਂ ਵੱਖਰੀ ਹੈ ਹਾਂ ਜੀ ਜਦ ਸਮੁੰਦਰ ਚ ਗਿਰ ਗਈ ਸਮੁੰਦਰ ਚ ਫੇਰ ਬੂਦ ਹੈ ਹੀ ਸਮੁੰਦਰ ਹਰ ਮੂਤ ਦਾ ਲੋਗ ਹੈ ਭੋਲੀਓ ਦਾ ਦਾ ਲੋ ਸੁਬੂਦਰ ਰਹੂਗਾ ਇਸ ਦਾ ਪਰਮੇਸ਼ਰ ਆਪਣੇ ਆਪ ਚਿੱਤੇ ਬੈਂਡਲ ਰਹੂਗਾ ਠੀਕ ਜਾ ਕੇ ਹਮ ਹਮ ਪਰ ਤਦਵਾਰ ਭਗਵਾਨ ਦੋਏ ਬਿਲਦੇ ਨੇ ਜਾ ਕੇ ਪਰਮੇਸ਼ਰ ਚ ਪਰਮੇਸ਼ਰ ਸੁਬੂਦਰ ਆ ਠੀਕ ਹੈ ਪਰ ਇਸ ਗੱਲ ਦਾ ਫਰਕ ਹੈ ਹਮ ਹਰ ਭਗਤ ਮਝ ਨਹੀਂ ਕੇਵਲਾ ਸਮਝਾਇਓ ਇੱਕ ਵਾਰ ਇਹ ਕੋਲ ਭਗਤੀ ਕੀ ਕਰੀਏ ਦੇ ਕੇਵਲ ਹੋਰ ਕਿਸੇ ਦੀ ਬਖਤੀ ਨਹੀਂ ਕਰਦੀ ਦੇ ਕੇਵਲ ਪਹਿਲਾਂ ਤਾਂ ਥਲ ਵਿੱਚੋਂ ਮਨ ਖੋਜਣਾ ਮਨ ਖੋਜਣਾ ਕ੍ਰਿਸ਼ਨ ਭਗਤੀ ਹਾਂਜੀ ਤਾਂ ਚੋ ਜਰ ਮਨ ਖੋ ਜਿਆ ਤਾਂ ਕ੍ਰਿਸ਼ਨ ਭਗਤੀ ਹੈ ਸਭ ਤੋਂ ਸਰ ਸਾਗਰ ਰਾਮ ਭయ్యా ਹੂੰ ਹੂੰ ਸਾਗਰ ਨਾ ਸਾਗਰ ਗੁਰਬੰਢਿਓ ਹਾਂਜੀ ਕਿਉਂਕਿ ਮਾਨ ਲੱਬ ਲਿਆ ਉਹਨੂੰ ਵਰਤੇ ਉਹਦੇ ਵਾਸਤੇ ਵਰਤੇ ਆਇਆ ਹੀ ਸਾਗਰ ਕ੍ਰਿਸ਼ਨ ਗੱਬਾ ਜਾਂ ਲੱਗਿਆ ਇੱਥੇ ਤੇ ਕ੍ਰਿਸ਼ਨ ਸੇਖੀ ਟ ਕੋਟੇ ਬਣਾਏ ਜਿਹੜਾ ਸਰੀਰ ਤੇ ਕੀੜਾ ਹੈ ਕ੍ਰਿਸ਼ਨ ਨੇ ਹੋਇਆ ਹਰ ਭਾਗ ਰਾਮ ਦੀ ਭਗਤੀ ਨਹੀਂ ਭਗਤ ਕ੍ਰਿਸ਼ਨ ਭਗਤੀ ਦੋਹੇ ਭਗਤੀਆਂ ਨੇ ਗੁਰਬਾਣੀ ਆਦ ਦੇ ਵਿੱਚ ਠੀਕ ਹੈ ਜੀ ਇੱਥੇ ਸੁਭਜਨਾ ਦੋਹੇ ਆ ਡਾ ਹੂੰ ਹੂੰ ਇੱਕ ਭਗਤ ਮੇਰੇ ਹਿਰਦੇ ਵਸਾ ਜਿਹਦੇ ਹਿਰਦੇ ਚ ਵਸਦਾ ਉਹ ਕੌਣ ਹੈ ਇੱਕ ਤਾਂ ਹਿਰਦੇ ਚ ਵਸਦਾ ਹੈ ਭਗਤ ਇੱਕ ਬਾਹਰ ਵਾਲਾ ਕੌਣ ਹੈ ਜਿਹੜਾ ਸਰੀਰ ਚ ਵਸਦਾ ਹੈ ਤਾਂ ਕ੍ਰਿਸ਼ਨ ਕਰਕੇ ਕ੍ਰਿਸ਼ਨ ਜਬਨਾਂ ਦੇ ਉੱਤੇ ਦਿਖਾ ਹੋਇਆ ਇਹਨਾਂ ਨੂੰ ਕੀ ਪਤਾ ਜਬਨਾਂ ਤੇ ਕ੍ਰਿਸ਼ਨ ਚੋਂ ਬਿਠਾਇਆ ਹੋਇਆ ਕ੍ਰਿਸ਼ਨ ਜਬਨਾਂ ਨਾਲ ਜੁੜਿਆ ਜਮਕਾ ਮਾਰਗਾ ਇੱਥੇ ਕਲਪਨਾ ਵਿੱਚ ਬੈਠਾ ਕਲਪਨਾ ਪ੍ਰੇਸ਼ਣ ਕਰਦਾ ਜਮਕਾ ਮਾਰਗਾ ਜਿਹਨਾਂ ਆਪਣੀ ਵਰਗੀ ਰਲਦਾ ਜਿਹੜਾ ਆਪਣਾ ਭਾਵੇਂ ਚੱਲਦਾ ਹੈ ਗਾਲ ਹੈ ਹਮ ਹਮ ਉਹ ਕ੍ਰਿਸ਼ਨ ਠੀਕ ਹੈ ਜੀ ਸਰ ਪਾਸ਼ਾ ਨੇ ਕ੍ਰਿਸ਼ਨ ਨਾਲ ਰਾਮ ਤਾਲ ਵਰਤੇ ਨੇ ਦੋ ਤਕल्लਸ ਹਮ ਹਮ ਆਪਣੇ ਹਾਂਜੀ ਪਰ ਇੱਕੋ ਛੰਦ ਵਿੱਚ ਵਰਤੇ ਹੋਏ ਨੇ ਹਮ ਹਮ ਕੀ ਪਤਾ ਕਿ ਕ੍ਰਿਸ਼ਨ ਰੰਗ ਕਿਉਂ ਵਰਤੇ ਹੋਏ ਨੇ ਹਮ ਹਮ ਜਿੱਦਾਂ ਕੁਰਬਾਨੀ ਸੁਧਿ ਜਾਣੇ ਨੂੰ ਪਤਾ ਲੱਗ ਜੂਗਾ ਕ੍ਰਿਸ਼ਨ ਰੰਗ ਹੁੰਦੇ ਕੌਣ ਨੇ ਅਜਾ ਉਹ ਨਾ ਉਹ ਦੀ ਤੈਨੂੰ ਉਲਤੀ ਹੋ ਅਜਾ ਵੀ ਚੱਕਰ ਤਾ ਰਾਜੀ ਦਾ ਸੀ ਬਿਸ਼ਣੂ ਠੀਕ ਹੈ ਜੀ ਇਹਨਾਂ ਕਰਮਣਾ ਬਚਸਾ ਜੀ ਇਹ ਕੇਵਲ ਰਿੱਧ ਤੇ ਧਲੇ ਕੇਵਲਾ ਰਿੱਧ ਤੇ ਨਾਲ ਲੱਗਿਆ ਹੋਇਆ ਲਾਇਆ ਹੋਇਆ ਸਹੀ ਹੈ ਬਬਰ ਦੀ ਗਲਗਾਉ ਬਖਤੀ ਦਾ ਅਹਿਰਦੈਨ ਸੁਬਦ ਠੀਕ ਹੈ ਫਿਰ ਹਰ ਭਗਤ ਨਿੱਜ ਤੇ ਰੁਕਾਂਗੇ ਪਹਿਲਾਂ ਹਾਂ ਬਿਲਕੁਲ ਫਿਰ ਨਹੀਂ ਕੇਵਲਾ ਰਿੱਧ ਤਾਂ ਨਾਲੇ ਨਾ ਰੋਕੋ ਹਾਂ ਭਗਤ ਰਿੱਧ ਕੇਵਲਾ ਰਿੱਧ ਕੇਵਲਾ ਰਿੱਧ ਤੇ ਰੋਕ ਲੋ ਚਾਹੇ ਚਾਹੇ ਦਰੋਕ ਲੋ ਰਿੱਧ ਕੀ ਫਰਕ ਕਰਮਣਾ ਬਚਸਾ ਮੈਨੂੰ ਪਤਾ ਹੈ ਕਿ ਕਰਮਚੋਅ আর ਬਚਨ ਦੇ ਵਿੱਚੋਂ ਇਹੀ ਪ੍ਰਤੀਤ ਹੋਵੇ ਹੂੰ ਹੂੰ ਜੋ ਹੱਥੇ ਚੀਜ਼ ਆ ਉਹੀ ਨਿਕਲੂਗੀ ਕਰਮ ਨਾਲ ਕਰਮ ਕਰਕੇ আর ਬਚਨ ਕਰਕੇ ਹਾਂ ਜੋ ਪਾਸ ਤੇ ਚ ਪਾਈ ਆ ਉਹੀ ਨਿਕਲਣੀ ਬਾਸ ਬਸ ਤੇ ਜਦ ਚ ਬਸਤੇ ਤੁਸੀਂ ਪਾਈ ਤੇ ਬਾਹਰ ਇਹੀ ਨਿਕਲੂਗੀ ਜੋ ਗੇਨ ਕੀ ਜਗੇਨ ਕੀ ਦਾ ਨੇਨ ਕੀ ਤਪਸਾ ਜਦੋਂ ਇਹ ਨਿਕਲਦੀ ਹੈ ਬਾਹਰ ਇਹ ਅਵਸਥਾ ਹੁੰਦੀ ਹੈ ਫਿਰ ਜਗੇਨ ਕੀ ਦਾ ਇਹਦੇ ਮੂਰੇ ਕੋਈ ਜਾਂਦਾ ਹੈ ਦਾ ਕੋਈ ਇਹਦੇ ਸਾਹਮਣੇ ਜੋਗ ਹੈ ਤੇ ਸਾਹਮਣੇ ਜੋਗ ਨਹੀਂ ਹੈ ਤੇ ਸਾਹਮਣੇ ਜਗਤ ਨਹੀਂ ਹੈ ਇਹਦੇ ਸਾਹਮਣੇ ਤਾਂ ਰਹਿਣ ਕੁਛ ਨਹੀਂ ਰਹਿ ਜਿੰਨ ਇਹਦੇ ਸਾਹਮਣੇ ਤੱਤ ਕੁਛ ਨਹੀਂ ਰਹਿ ਜਾਂਦੇ ਫੇਰ ਕੁਛ ਵੀ ਨਹੀਂ ਰਹਿ ਜਾਂਦੇ ਚਾਰੇ ਇਹਨਾਂ ਦਾ ਰਹਿ ਜਾਂਦੀ ਹੂੰ ਜਿਹੜੇ ਆ ਜੀ ਦੱਸੋ ਇੱਕ ਵਾਰ ਜੋਗ ਦਾ ਜੋਗ ਰਹਿ ਗਿਆ ਜੋਗ ਦੀ ਹੀ ਲੋੜ ਹੂੰ ਜੋਗੀਨ ਇਹਦੇ ਸਾਹਮਣੇ ਜੋਗ ਤਾਂ ਖਵਲੀ ਹੈ ਠੀਕ ਹੈ ਇਹ ਭਗਤੀ ਸਾਹਮਣੇ ਹੂੰ ਖਤਮ ਇਹੇ ਸਾਹਮਣੇ ਇਹ ਯਾਗ ਕਰਦੇ ਤੇ ਰਿਸ਼ੀ ਉਹ ਨਹੀਂ ਕਰਉਂਦੇ ਤੇ ਉਹ ਬੇਕਾਰ ਠੀਕ ਹੈ ਹੈ ਉਹਨਾਂ ਦੀ ਲੋੜ ਨਹੀਂ ਹੈ ਹਾਂ ਨੇ ਉਹ ਤੋਂ ਤੁਛ ਠੀਕ ਹੈ ਜੀ ਰਹਿ ਜਾਂਦੀਆਂ ਨੇ ਦਾਣ ਤਰ੍ਹਾਂ ਤਰ੍ਹਾਂ ਦੇ ਪੂਜਿਤਾਰ ਉਹ ਜਿਹੜੇ ਗਾਇਦਾਨ ਹਾਂ ਦਾਰੀ ਦਾ ਉਹ ਦਾਣ ਤੋਂ ਠੀਕ ਹੈ। ਯਾ ਇਹ ਟੱਪਟ ਜਿਹਨੇ ਟੱਪਰੇ ਸਭ ਕੁਝ ਰਹਿ ਜਾਂਦੇ ਨੇ। ਠੀਕ ਹੈ ਜੀ। ਪੰਜ ਇਹਨਾਂ ਤੋਂ ਭਜ ਗਈ ਗਈ ਭਗਤੀ ਹਿੰਦੂਸਤਾਨ ਦੀ ਇਹ ਦੱਸੋ। ਠੀਕ ਕਿਹੜੀ ਚੀਜ਼ ਬਚ ਗਈ? ਹੁਣ ਬੱਜੀ ਕੀ ਆ? ਸਾਰਾ ਹੀ ਅੱਖੋਂ ਕਿਸੇ ਚੀਜ਼ ਦਾ। ਯੋਗ ਮਤ ਖਤਮ। ਹਿੰਦੂ ਮਤ ਸਾਰੀ ਜੱਗ ਦੇ ਵਿੱਚ ਆ ਜਾਂਦੀ ਐ ਸਖਤਾਂ। ਰਿਜੀਵੂ ਦੀ ਸਾਰੇ ਖਾਤਮ ਹੂੰ ਹੂੰ ਤਾਂ ਸਭ ਪ੍ਰਕਾਰ ਦੇ ਵਿਸਫਰ ਹੂੰ ਹੂੰ ਇਹ ਫੋਕੜ ਤਰਬ ਦੇ ਸਾਰੇ ਫੋਕੜ ਤਰਬ ਕਚੂ ਫੜਨਾ ਹੈ ਹੂੰ ਸਭ ਪ੍ਰਕਾਰ ਤੇ ਇਹ ਕਹਿੰਦਾ ਫੋਕੜ ਇਹ ਜਿਹੜੇ ਤਰਬ ਤਰਬ ਚ ਲੁੱਟੇ ਜਦਦੇ ਸਾਰੇ गोबिंद गोबिंद देत जप नर सकल सिद्ध पदं ओ इथे ਵੀ ਦੋਏ ਆ ਗਏ ਗੋਬਿੰਦ ਆ ਗਿਆ ਗੋਬਿੰਦ ਦੇਤ ਆ ਗਿਆ ਅੱਛਾ ਜੀ ਦੋ ਆ ਠੀਕ ਹੈ ਗੋਬਿੰਦ ਆ ਗੋਬਿੰਦ ਦੀ ਦੇਣ ਠੀਕ ਹੈ ਜੀ ਜਿੱਦ ਆ ਗਏ ਫਸੇ ਇਹਨਾਂ ਨੂੰ ਜਪਤ ਕਰਨ ਨੂੰ ਹੂੰ ਦੋਹਾਂ ਨੂੰ ਜਾਣ ਲੈ ਹੈ ਠੀਕ ਹੈ ਜੀ ਦੋਹੇ ਜਾਣ ਲੈ ਪਹਿਲਾਂ ਬਰ ਜਾਣ ਲੈ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਆਤਮ ਦੀ ਜੋਤ ਕਦੇ ਸਰੀਰ ਦੇ ਵਿੱਚ ਜੋਤ ਹੈ ਜੋਤ ਕੌਣ ਹੂੰ ਮਨ ਸਰੂਪ ਹੈ ਜੋਤ ਮੈਂ ਜਾਤਾ ਜਿਹਨੂੰ ਜਾਣਨ ਸੀ ਉਹ ਜੋਤ ਦੇ ਵਿੱਚੋਂ ਚੜ੍ਹੇ ਦੋਏ ਲੱਪਣੇ ਪਾਈ ਪਹਿਲੇ ਜੋਤਨਪੜੀ ਪਾਈ ਜਿਹਨੂੰ ਜੱਲ ਹੋ ਲੱਪਣਾ ਪਿਆ ਹੋਏ ਉਹ ਤੇਨੇ ਧੋਏ ਤੇਨੇ ਇੱਕ ਨਹੀਂ ਗੱਲ ਕਰਨੀ ਚਾਹੀਦੀ ਜਿੰਦਾ ਪਰਮਾਤਮਾ ਦੀ ਤਾਂ ਹੀ ਦੀ ਸਵਾਲ ਠੀਕ ਹਲਦਾ ਉਹਦਾ ਹੁਣ ਦਾ ਬਾਬਲ ਕਰਦਾ ਕਰਦਾ ਉਹ ਹੂੰ ਏਡਾ ਪਹਿਲੇ ਕਹੋ ਤੁਸੀਂ ਕਿਵੇਂ ਵੜ ਜਾਓਗੇ ਇੱਕ ਹੋਣਾ ਇੱਕ ਨੂੰ ਮਿਲਣਾਉਂਦੀ ਇੱਕ ਇੱਕ ਹੋ ਲੈ ਬਲਕੇ ਨਾ ਕਿ ਦੇਵ ਚ ਮਿਲਣਾ ਮਿਲਣਾ ਠੀਕ ਹੈ ਜੀ ਦੇ ਵਿਚ ਮਾ ਉਹ ਫਿਰ ਸ਼ਬਦ ਹੈ ਸ਼ਬਦ ਗੁਰੂ ਹੈ ਹੂੰ ਉੱਤੇ ਜ਼ੋਰ ਬੁਲਾਉਣੀ ਆਪਣੀ ਹੂੰ ਉੱਤੇ ਦਾ ਸੁਰੇ ਬੁਲਾਉਣੀ ਹੈ ਹਾਂਜੀ ਆਵਾਜ਼ ਬੁਲਾਉਣੀ ਹੈ ਰਾਗੀ ਚਾਹੇ 10000 ਹੋਵੇ ਆਵਾਜ਼ ਕੋਈ ਵੀ ਸਾਰਿਆਂ ਦੀ ਜੇ ਸੋੜੇ ਹੂੰ ਬੈਠੇ ਬੱਕਰੇ ਬੱਕਰੇ ਹੋੜ ਗਏ ਛੇਰ ਕਰਕੇ ਠੀਕ ਹੈ ਜੀ ਰਾਜ ਕੋਈ ਉਹ ਗੱਲ ਲੱਗ ਹਾਂ ਜੀ ਨਰ ਸਕੰਨ ਸਿੱਧੀ ਪਦੰ ਇਹ ਨਾਲ ਇਹ ਹੀ ਜਗਲ ਸਿੱਧੀ ਦਸ ਦੇਖੋ ਸਿੱਧੀ ਲੱਗਦਾ ਇੱਕ ਵਜਨ ਇੱਕ ਵਜਨ ਸਿੱਧੀ ਹਾਂ ਜੀ ਉਹ ਜਿਹੜੇ ਤੇ ਸਿੱਧੀ ਦਾ ਗਲਤ ਕੀਤਾ ਸਿੱਧੀਆਂ ਬਾਰੇ ਸੋਚੀਏ ਕਿ ਵੀਨੇ ਤਾਂ ਗੋਬਿੰਦਦੇਵ ਦਾ ਵੀ ਨਹੀਂ ਅਰਥ ਕੀਤਾ ਤਾਂ ਗੋਬਿੰਦ ਕਰਕੇ ਹੀ ਗਏ ਆ ਇਹ ਭਾਈ ਗੋਬਿੰਦ ਦਾ ਭਜਨ ਕਰ ਗੋਬਿੰਦ ਨੂੰ ਜਪ ਹੋਈ ਸਾਰੀ ਸਿੱਧੀਆਂ ਦਾ ਖਜ਼ਾਨਾ ਹੈ ਅੱਛਾ ਕਰਤਾ ਨਾ ਹੋਈ ਗੱਲ ਇਸ ਦੂਸਤ ਨਾ ਗੋਬਿੰਦਦੇਵ ਤੇ ਬਾਰੇ ਤਾਂ ਗੱਲ ਨਹੀਂ ਕੀਤੀ ਕਿਉਂ ਕਰੂਗਾ ਹੋਰ ਪਤਾ ਹੀ ਛੱਡਿਆ ਹੋਇਆ ਹੂੰ ਕੀ ਹੋਇਆ ਆਈ ਨਾ ਕੋਈ ਰੋਇਆ ਹੋਇਆ ਇਹ ਤਾਂ ਬਦਵਲ ਨੂੰ ਲਿਖਿਆ ਜੀ ਹਮ ਹਮ ਹੱਬੇ ਜ਼ੋਰ ਪਾ ਦਈ ਜਾਂਦੇ ਨੇ ਖੋਜਦੇ ਕੀ ਨੇ ਫੇਰੇ ਕੀ ਖੋਜਦੇ ਨੇ ਕੀ ਕਰਦੇ ਨੇ ਹਮ ਇਹਦੇ ਕਲਾਕਾਰ ਤੇ ਇੱਥੇ ਲਾਉਂਦੇ ਜ਼ੋਰ ਹਾਂਜੀ ਪਰ ਇਹ ਗੋਵਿੰਦ ਲਿਖਿਆ ਗੋਵਿੰਦ ਤੇ ਕੀਤੇ ਕਿਉਂ ਦੀ ਕੀਤੇ ਔਖਾ ਰਹਿ ਬਹੁਤ ਔਖਾ ਹੀ ਹਾਂ ਉਹ ਔਖਾ ਖਾਲੇ ਜਾਉਣਾ ਜਾਣਾ ਖਾਲੇ ਚੱਲਿਆ ਤੇ ਜਾਂਦਾ ਹੂੰ ਜੇ ਤਾਂ ਵਿਦਵਾਨਾਂ ਦੇ ਖਾਲੇ ਜਾ ਜਾਵੇ ਹੂੰ ਇਹ ਤਾਂ ਗੱਲ ਹੋਰ ਹੈ ਰਵਿਦਾਸ ਨੇ ਖਾਲੇ ਚਲੇ ਜਾਂਦੇ ਹੂੰ ਜਦੋਂ ਤੇ ਰਵਿਦਾਸ ਨੂੰ ਕਹਿੰਦੇ ਸੀ ਨਾ ਸੰਭਲਟਾ ਹੂੰ ਹੂੰ ਕੀ ਹੋਇਆ ਹੂੰ ਹੂੰ ਵਿੱਚ ਉਹਨਾਂ ਉੱਪਰ ਪ੍ਰਚਾਨ ਕਰਨ ਵੀ ਤਰਾ ਕੇ ਛੱਡਦੇ ਨੇ ਫਿਰ ਹਾਂ ਇਹਨਾਂ ਨੂੰ ਪਤਾ ਨਹੀਂ ਕੁਝ ਨਾਲ ਉਹਨਾਂ ਦੀ ਬਹੁਤ ਜਿਆਦਾ ਪਤਾ ਲੱਗੂ ਇਹ ਕਰੀ ਰਿਹਾ ਜੀ ਲੋਕ ਤਾਂ ਹਾਲੇ ਤੱਕ ਡਾਕਟਰ ਨੂੰ ਮਿਲ ਕੇ ਇਹਨਾਂ ਨੂੰ ਕੀ ਸਰਕਾਰ ਹਾਂ ਗੋਲਾਂਡ ਕੇ ਟੀਪਾੜਾ ਹੋਇਆ ਸੀ ਉਹ ਬੱਕੇ ਤੇ ਹੀ ਹੱਥ ਪਾ ਲਵੇ ਹੂੰ ਦੇ ਆਪੇ ਲਿਖਿਆ ਉਹਨੇ ਸਾਰੇ ਜਿੰਦਗੀ ਸਾਰੇ ਏਰੀਆ ਚ ਫਿਰਿਆ ਬਸ ਦੇ ਛੇਰ ਬੁਗ ਹਾਂਜੀ ਨਾ ਸਾਬ ਉਹਨਾਂ ਦੇ ਨਾਮ ਮੁਸਲਮਾਨਾਂ ਦਾ ਹੀ ਰਾਸ ਸੀ ਇੰਡੀਆ ਚ ਵੀ ਫਿਰ ਹਮ ਇਹਦੀ ਐਡੀ ਮਾਹੌਲ ਹੈ ਜੈ ਦੇਵ ਆਇਓ ਤਸ ਸੁਪਤੰ ਪਵ ਭੂਤ ਸਰਬ ਗਤੰ ਜੈ ਸਰ ਫੂਟਿੰਗ ਗੁਰ ਜਯਦੇਵ ਜਿਹੜਾ ਹੈਗਾ ਉਹਨੇ ਆਪਣਾ ਨਾਮ ਦੀ ਵਰਤਿਆ ਹੈ ਹਮ ਹਮ ਇਹ ਉਹਨੇ ਇਹਦਾ ਜਿਹੜਾ ਨਾਮ ਹੈ ਨਾ ਹਮ ਹਮ ਇਹਦਾ ਗੁਰਵਾਜ ਵਰਤਿਆ ਅੱਛਾ ਜੀ ਆਇਓ ਆਇਓ ਆਇਓ ਆਇਓ ਜਯਦੇਵ ਆਇਓ ਤੇ ਬੋਲ ਰਿਹਾ ਹਮ ਦੂਜੇ ਰਵਾਇਓ ਕਰਕੇ ਦੂਆ ਹਮ ਹਮ ਉਹ ਜਯਦੇਵ ਰਿਹਾ ਆਇਓ ਕੋਈ ਆਇਆ ਹੋ ਰਿਹਾ ਜਿਹੜਾ ਆਇਆ ਉਹ ਜੈਦੇਵ ਹਾਂਜੀ ਜੈ ਜੈ ਕੀ ਹੈ ਬੰਦੂ ਜਿੱਤਣ ਵਾਸਤੇ ਜਿਹੜਾ ਆਇਆ ਹੈ ਕੁਝ ਡੁਬੜਿਆ ਉਹਨੂੰ ਜੈਦੇਵ ਕਹਿੰਦੇ ਹੂੰ ਹੂੰ ਜਿੱਤੇ ਜਗਦੀਤ ਹੈ ਨਾ ਹਾਂਜੀ ਜਿੱਤ ਪ੍ਰਾਪਧੋਈਆ ਮੰਨਤੇ ਹੂੰ ਹੂੰ ਉਹ ਜਿਹੜੀ ਗੈਗ ਦੇ ਫਤੇਆਂ ਉਹ ਗੱਲ ਹੈ ਤੇਗੋ ਤੇਗੋ ਫਤੇ ਸਾ ਟੇਗਾ ਹੋਊਗੀ ਫਤਿਹ ਹੂੰ ਹੂੰ ਦਊਗਾ ਟੇਰ ਤਾਲੂ ਵਦੇ ਹੂੰ ਹੂੰ ਜੇ ਬਵੇਕ ਬੁੱਧੀ ਉਹ ਤਾਂ ਫਤੇ ਹੋ ਹੂੰ ਹੂੰ ਕੱਲ ਬਵੇਕ ਬੁੱਧੀ ਦੀ ਮਿਲਣਦੀ ਐ ਹੂੰ ਹੂੰ ਜਦੋਂ ਆਇਆ ਮੇਰੇਗਾ ਆਇਆ ਰਾਜਾ ਰਾਮਪਧਾਰਾ ਹੂੰ ਇਹ ਸ਼ਬਦ ਇਹਦੇ ਵਿੱਚ ਪ੍ਰਗਟ ਹੋਇਆ ਹੈ ਸ਼ਬਦ ਨੇ ਆ ਕੇ ਜਾਇਕੀ ਕੀ ਹੈ ਸ਼ਬਦ ਪ੍ਰਗਟ ਹੋਇਆ ਇਹਦੇ ਵਿੱਚ ਅਸ ਸਪੋਰਟਲਸ ਦਸ ਸਪੋਰਟ ਹੋਇਆ ਹੋਇਆ ਅੰਦਰੋਂ ਪਟਿਆਲਾਂ ਵੀ ਉਹ ਜਦ ਜੱਬਦਾ ਹੈ ਬੀਜ ਫਿਰ ਫੁੱਟਦਾ ਨਾ ਅੰਦਰੋਂ ਫੁਹਾਰਾ ਇੱਕ ਦੇ ਵਿੱਚੋਂ ਹੀ ਨਿਕਲਣਾ ਜੋ ਕੁਝ ਨਿਕਲਣਾ ਹੈ ਫੈਲਾਉਂਦਾ ਹਾਲ ਹੈ ਫਿਰ ਖੁੱਦ ਹੈ ਹਮ ਹਮ ਯਾ ਜਬ ਦਾ ਬੀਚ ਫਿਰ ਫੁੱਟਦਾ ਠੀਕ ਹੈ ਜੀ ਇਹ ਤੇ ਖੁੱਦਦਾ ਹਮ ਹਮ ਨੇ ਗੋਲਾ ਗਿਆਨ ਚਲਾਇਆ ਹਮ ਉਹਦਾ ਕਾਰਨ ਫਿਰ ਬਿਸਪੋਰਟ ਹੁੰਦਾ ਜੀ ਬਿਸਪੋਰਟ ਇੱਕ ਅੱਛਾ ਅੰਦਰ ਬਣਦਾ ਸੱਚ ਖੜਦਾ ਨਾ ਹਾਂਜੀ ਤਾਂ ਗੁਰਦੁਆਰਾ ਸੁਪ ਕਰਿਆ ਬਤਾ ਰਾਈ 10 ਰੁਪਏ ਹੈ ਹਾਂ ਹਾਂ ਇੰਨਾ ਛੋਟਾ ਹੋ ਕੇ ਨੇ ਅੱਛਾ ਜੀ ਜਾਣੇ ਸੱਚਖੰਡ ਨਾ ਉਹ ਛੋਟਾ ਹੋ ਜਾਂਦਾ ਹੈ ਹਾਂ ਬੜਾ ਹੋ ਜਾ ਸਿਰਫ 100 ਹੋ ਕੇ ਉਧਰ ਜਾ ਕੇ 100 ਹੋ ਜਾਣ ਇਹਦਰਾ ਗੈਨੇ ਆਪਰੇ ਆਪਣੇ ਆਤਮ ਦੇ ਨਾਲ ਜੁੜਨੇ ਆਪਣੇ ਆਪ ਨੂੰ ਜੁੜਨੇ ਬਾਹਰ ਮਾਇਆ ਤਿਆਗ ਦੇਣੀ ਹੈ ਇੱਕ ਬਿੱਦੂ ਤੇ ਤੇ ਜੇ ਸਰਕਲ ਦਾ ਇੱਕ ਬਿੱਦੂ ਹੁੰਦਾ ਤਾਂ ਸਾਰੀ ਮਾਇਆ ਦੇ ਸਰਕਲ ਦਾ ਸੈਂਟਰ ਬਣ ਜਾਵੇ ਠੀਕ ਬਾਹਰ ਜਾ ਕੇ ਸਰ ਬਿਆਕੀ ਹੋ ਜਾਣ ਫਿਰ ਆਪਣੇ ਆਪ ਤੇ ਰਹੀ ਧਿਆਨ ਰੱਖ ਸਕਦਾ ਫਿਰ ਬਾਹਰ ਬੁਖੀ ਧਿਆਨ ਲੱਖੂਗਾ ਫਿਰ ਧਿਆਨ ਲੱਖੂਗਾ ਜਿਹੜੇ ਗਾ ਰਹੇ ਨੇ ਉਹਨਾਂ ਦੇ ਸ਼ਬਦ ਵਿੱਚ ਅੱਛਾ ਜੀ ਗਾਇ ਬਿਨਾ ਸੁਣਦਾ ਫਿਰ ਉਹ ਸ਼ਬਦ ਦੇ ਵਿੱਚ ਦਿਲਦਾ ਹੂੰ ਤੋਂ ਧਿਆਨ ਹਟਾ ਕੇ ਸ਼ਬਦ ਵਿੱਚ ਝੋਲਣਾ ਇਧਰੋਂ ਪਟਣਾ ਉਧਰ ਲਾਉਣਾ ਠੀਕ ਉਧਰ ਧਿਆਨ ਇਧਰੋਂ ਪਟਣ ਧਿਆਨ ਤਾਂ ਛੋਟਾ ਹੋ ਜਾਣਾ ਜੇ ਉਧਰ ਲਾਉਣਾ ਧਿਆਨ ਫਿਰ ਉੱਥੇ ਤੱਕ ਹੋ ਜਾਣਾ ਜਿੱਥੇ ਤੱਕ ਉਹ ਸ਼ਬਦ ਜਾਂਦਾ ਸਰ ਬਿਆਪੀ ਹੋ ਜਾਣਾ ਸ਼ਬਦ ਦੇ ਵੀ ਰਲ ਗਿਆ ਸਰ ਬਿਆਪੀ ਹੋ ਗਿਆ ਠੀਕ ਇਹ ਗੁਰਬਾਣੀ ਦੇ ਵਿੱਚ ਇਸ ਗੱਲ ਦੀ ਇੱਕ ਸਮਝੋ ਪੇਰ ਬੁਝਣ ਵਾਲੀ ਗੱਲ ਹੈ ਹਮ ਹਮ ਨਾਲ ਬੁਗਦਾਰਾ ਸੋਕ ਰੱਖਾਇਦਾ ਵਾਲੀ ਗੱਲ ਹੈ ਉਹ ਸਪੋਰਟ ਲਬ ਉਸੇ ਕਰਕੇ ਬਸਦੇ ਆ ਗੋਲਾ ਤਨ ਚਲਾਇਆ ਕਿ ਗੋੜਾ ਚੱਲੂ ਕਾ ਆ ਗਿਆ ਹੰ ਬਿਲਕੁਲ ਕੋੜਾ ਹੋਊਗਾ ਹਾਂਜੀ ਵਿਸਪੋਰਟ ਹੋਊ ਹਾਂਜੀ ਇਹ ਪਵ ਭੂਤ ਸਰਵ ਗਤਨ ਫਸ ਫਿਰ ਆ ਜਿਹੜਾ ਭਵਦੀ ਭੂਤ ਹੈ ਇਹ ਬਿੱਜੜਾ ਜੂ ਇਹ ਬਾਹਰ ਕਰ ਰਹੇ ਇਸ ਸੁਖ ਸਾਧਨ ਚਲਿਆ ਜਾਊਗਾ ਤੇ ਸਪੋਰਟ ਹੋ ਗਏ ਅਸੀਂ ਇਸੇ ਪਸਾਰ ਸੁਖ ਸਾਧਨ ਦੇ ਵਿੱਚੇ ਰਹੂ ਹੂੰ ਹੂੰ ਪਾਪ ਸਾਧਨ ਦਾ ਇਹਦਾ ਹਿਰਦਾ ਜਿਹੜਾ ਹੈਗਾ ਸੁਖ ਸਾਧਨ ਜਦੋਂ ਹੋ ਜੂਗਾ ਪਾਪ ਸਾਧਨ ਉਹਦੇ ਵਿੱਚੇ ਹੀ ਸੁਭਾਜੂ ਇਹ ਕਹਿੰਦਾ ਸਪੋਰਟ ਜਦੋਂ ਵਿਸਪੋਰਟ ਉਹ ਪਹਿਲਾਂ ਕਰਨਾ ਇਹਦਾ ਹਿਰਦਾ ਇਹਨਾਂ ਵਰਮ ਕਹਿੰਦੀ ਕਹੇ ਪ੍ਰਗਾਸ ਜੈਸੇ ਤਾਰੂ ਪਰਗਾਸ ਤਾਂ ਪਹਿਲਾਂ ਹੀ ਹੈ ਜਬ ਇਸ ਬੋਰਡ ਉੱਪਰ ਗਿਆ ਲੋ ਬਦੂ ਹੈ ਹਾਂ ਬਸ ਠੀਕ ਹੈ ਜੀ ਕਿਹਨ ਨਾਲ ਇਹਦਾ ਦਾ ਸੁਪਾ ਪਪੂ ਤਾਂ ਸਰਬਗਤੰਗ ਦਾ ਮਤਲਬ ਹੈ ਵੀ ਇਹ ਜਿਹੜਾ ਹੈਗਾ ਭਵਸਾਗਰ ਇਹਨਾਂ ਦੀਆਂ ਗੱਲਾਂ ਇਹ ਇਹਨਾਂ ਦਾ ਇਹਨਾਂ ਤੋਂ ਪਰੇ ਚਲਾ ਗਿਆ ਇਹਨਾਂ ਦੀ ਸਭ ਗੱਲ ਹੀ ਇਹ ਜਿਹੜੀ ਬਾਪੂ ਦੀਆਂ ਦਸਤੀਆਂ ਤੋਂ ਪਰੇ ਦੀ ਗੱਲ ਹਮ ਜਦੋਂ ਅੰਦਰ ਗਿਆਨ ਜਦੋਂ ਜੈਦੇਵ ਦੇ ਅੰਦਰ ਉਹ ਗਿਆਨ ਆਇਆ ਅੰਦਰੋਂ ਫਿਰ ਹੋਇਆ ਉਹ ਤਾਂ ਇਹ ਕਹਿਣਾ ਵੀ ਸਰੀਰ ਦੇ ਨਾਲ ਜਿਹੜਾ ਸਰੀਰ ਦੇ ਨਾਲ ਉਹ ਕਨੈਕਸ਼ਨ ਟੁੱਟ ਗਿਆ ਸੰਸਾਰ ਨਾਲੇ ਟੁੱਟ ਗਿਆ ਸੰਸਾਰ ਨਾਲ ਜਿਉਦਾ ਹੀ ਵੱਖਰਾ ਹੋ ਗਿਆ ਠੀਕ ਹੈ ਕਬੀਰ ਕਹਿੰਦਾ ਏਕ ਜੋਤ ਇੱਕਾ ਜਿਲੀ ਕਰਵਾ ਹੋਏ ਹੋਏ ਹੂੰ ਹੂੰ ਜਾਂ ਜੋਤੀ ਜੋਤ ਬਲ ਗਈ ਤੇ ਸਰੀਰ ਹੋਵੇ ਜੈਨਾ ਹੋਵੇ ਸਰੀਰ ਦਾ ਫਿਰ ਕੀ ਰੋੜ ਰਹਿ ਠੀਕ ਹੈ ਜੀ ਤੇ ਇਸ ਆਪਾਂ ਪਹਿਲਾਂ ਵੀ ਗੱਲ ਕਰੀਏ ਵੀ ਸ਼ਬਦ ਦੀ ਇਕਤਾ ਜਿਹੜੀ ਹੈਗੀ ਭਾਸ਼ਾ ਸ਼ੈਲੀ ਉਹ ਸੰਸਕ੍ਰਿਤ ਵਿੱਚ ਜ਼ਿਆਦਾ ਇਹਦਾ ਬੇਸ ਹੈ ਅਤੇ ਦੂਸਰਾ ਇਹ ਹੈ ਵੀ ਇਹਦੇ ਜਿਹੜੇ ਅਰਥ ਵੈਸੇ ਹੋਏ ਹੋਏ ਆਂ ਦੁਨਿਆਵੀ ਤੌਰ ਤੇ ਉਹ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਪਰ ਇਸ਼ਾਰਾ ਹੀ ਨੀ ਪਾਉਂਦੇ ਵੀ ਕੀ ਸ਼ਬਦ ਕੀ ਇਹ ਤੋਂ ਸਿੱਖਿਆ ਲੈਣੀ ਨਹੀਂ ਨਾ ਲਾਈਨ ਛੱਡੀ ਆਪਾਂ ਫਸੇ ਹਾਂ ਕਿਉਂਕਿ ਗੁਰਮਤਿ ਸਿਧਾਂਤ ਤੁਹਾਨੂੰ ਕਲੀਅਰ ਹੈ ਜੇ ਸਿਧਾਂਤ ਕਲੀਅਰ ਹੈ ਫਿਰ ਉਹ ਜਿਹੜੀ ਗੱਲ ਹੈ ਉਹਨੂੰ ਮੋੜ ਕੇ ਉਹਦੇ ਵਿੱਚ ਲਿਆ ਕੇ ਆਪਾਂ ਫਰੇਮ ਸਪਸ਼ਟ ਨਾਲ ਕਹਿ ਸਕਦੇ ਆ ਦੇ ਫਰੇਮ ਚ ਬਟਕਾ ਲਈ ਜੀ ਇਹ ਗੱਲ। ਹਾਂ ਜਿਵੇਂ ਹੁਣ ਇੱਥੇ ਤੋਂ ਇੰਪੋਰਟੈਂਟ ਗੱਲ ਸੀਗੀ ਗੋਬਿੰਦ ਦੇ ਤੇ ਉਹਦਾ ਤਾਂ ਇਹਨਾਂ ਨੇ ਕੋਈ ਭਾਵ ਵੀ ਨਹੀਂ ਕੱਢਿਆ। ਤੇ ਜਿਹੜਾ ਫਰੀਦਕੋਟ ਵਾਲਾ ਜੀ ਵੀ ਹੈ ਨਾ ਫਰੀਦਕੋਟ ਆ ਜੀ ਵੀ ਕਹੀ ਜਾਂਦੇ ਹੈ ਨਰ ਗੋਬਿੰਦ ਗੋਬਿੰਦ ਐਸੇ ਜਾਪ ਕਰ ਜੋ ਜਾਪ ਸਭ ਸਿੱਧੀਆਂ ਕਾ ਪਦੰ ਆਸਰਾ ਹੈ। श्री देव जी कहते हैं श्री जयदेव जी कहते हैं जो पव पूत सर्वगतं पवेख्यात काल भूत काल वर्तमान काल सर्व में एक रस पूरण प्राप्त है मैं सफूट प्रगट जिसकी शरण मैं आया हूं ओ तो कोई भाव ही नहीं बनदा वैसे तो ਜਿਹੜੇ ਔਖੇ ਸ਼ਬਦ ਨੇ ਐਸੇ ਟੀਕੇ ਨੂੰ ਘੁਮਾ ਫਰਾ ਕੇ ਇਹ ਲਫ਼ਜ਼ ਕਹਤੇ ਸਾਰਿਆਂ ਦੇ ਹਾਂਜੀ ਜੀ ਬਈ ਗੈਰ ਉਹ ਟੀਕਾ ਇੱਕ ਹੋਇਆ ਹੋਇਆ ਹੈ ਹਾਂਜੀ ਅਬ ਉਹ ਟੀਕਾ ਦੀ ਰਸਲ ਹੈ ਠੀਕ ਹੈ ਜੀ ਉਹ ਤਾਂ ਜੇ ਤੁਸੀਂ ਹਰਬੰਸ ਸਿੰਘ ਦਾ ਟੀਕਾ ਪੜੋ ਜਿਹੜਾ ਉਹਨਾਂ ਨੇ ਦਰਸ਼ਨ ਫਟਾ ਬਲੂ ਨੇ ਦੇਖਿਆ ਠੀਕਾ ਹਮ ਵਾਰ ਵਾਰ ਇਹੀ ਕਹਿ ਰਹੇ ਹਾਂਜੀ ਪਰ ਇਹ ਗੱਲ ਕਹਿ ਦੇ ਵੀ ਕਿ ਉਹ ਡੀ ਕੇ ਜੋ ਆਇਆ ਨਹੀਂ ਫਿਰ ਚੰਗਾ ਨਹੀਂ ਸਮਝਿਆ ਉਹ ਤਾਂ ਹੁਣ ਇੱਕ ਦੋਸਤ ਬੈਠੇ ਹੋ ਇੰਨਾ ਬੋਲ ਬੈਠੇ ਹੋ ਤੇ ਉਹ ਲੌਖਾ ਹੋ ਜਾਂ ਹਾਂਜੀ ਹੋਲ ਜੋ ਇਹ ਨਾ ਤੇ ਘੇਰ ਲੋ ਕਹੋ ਗਿਆ ਬੰਦੇ ਨਾ ਜਾ ਹੂੰ ਸਰਬੂ ਦੇ ਜਿਹੜਾ ਹੈ ਗਿਆਨ ਇਹਨੂੰ ਕਨਸਟੀਟਿਊਸ਼ਨ ਜਿਹੜਾ ਬਣਾ ਲੂ ਉਹ ਬੂਰਖਾ